ਜੇ ਨਹੀਂ ਤੇ ਜਾ ਕੇ ਸੌਂ ਜਾਓ ਬਾਬਾ ਕਰਨ ਸਿੰਘ ਜੀ ਆਂਦੇ ਮੈਂ ਸਾਰੇ ਸਾਰੇ ਮੇਲੇ 'ਚ ਮੈਨੂੰ ਇੱਕ ਬੰਦਾ ਕੋਈ ਗੱਲ ਕਰਦਾ ਨਜ਼ਰ ਨਹੀਂ ਲੱਭਦਾ ਮੈਨੂੰ ਸਾਰੇ ਮੇਲੇ ਦੇ ਵਿੱਚੋਂ ਕੋਈ ਇੱਕ ਬੰਦਾ ਕਿਹੜੇ ਦੇ ਕੋਈ ਬਰਖ ਲਾਇ ਭਜਾਉਂ ਉੱਚੀ ਨਿੱਕੀ ਕੋਈ ਗੱਲ ਕਰਦਾ ਆਂਦਾ ਮੈਂ ਤਿੰਨ ਵਾਰ ਤੁਰਿਆ ਆਂ ਜਦੋਂ ਤੁਰਨ ਲੱਗਦਾ ਹਾਂ ਰੋਲ ਡੇ ਪੈਂਦਾ ਹਾਂ ਸਤਿਗੁਰੂ ਪ੍ਰਤਾਪ ਸਿੰਘ ਮਹਾਰਾਜੀ ਕੋਲ ਮੈਂ ਗਿਆ ਮੇਰਾ ਹਿਆ ਨਾ ਪਵੇ ਵੀ ਮੈਂ ਚੱਲਿਆ ਮੈਂ ਰੋਈ ਜਾਵਾਂ ਹੋਰਲੇ ਸਹਿਬਾਂ ਕੋਲ ਅਖਣਗਾ ਮੈਂ ਇਹਨਾਂ ਕੋਲ ਗਿਆ ਕੇ ਮੱਥਾ ਟੇਕਿਆ ਫਿਰ ਆਂਦੇ ਮੇਰਾ ਮੈ ਨਹੀਂ ਨਾ ਰੰਦਾ ਮੈਂ ਸਾਰਾ ਮੇਲਾ ਹੀ ਉਰਾਗੀ ਹੋਇਆ ਵੇਖਿਆ ਇਕ ਥਾਂ ਬਾਬਾ ਤਰਨ ਸਿੰਘ ਜੀ ਆਂਦੇ ਨੇ ਇੱਕ ਮੁਗਬਰੀ ਆਇਆ ਦੋ ਜਣੇ ਸੀ ਗ੍ਰਾਮ ਮੁਖਮੀ ਕਰਨੇ ਇਥੇ ਆਏ ਤੇ ਇਥੋਂ ਦਾ ਬਹਰ ਆਉਂਦਿਆਂ ਹਲਚਲ ਵੇਖਿਆ ਜਿੱਥੇ ਦੋ ਬੈਠੇ ਨੇ ਦੋ ਸ਼ਬਦ ਪੜ੍ਹਨ ਦੇ ਜਿੱਥੇ ਕੋਈ ਕੱਲਾ ਬੈਠਾ ਹੋ ਮਾਲਾ ਫੇਰਨ ਲਿਆ ਇਥੋਂ ਦੀ ਜੇਕਰ ਦੋ ਜਾਣ ਬੈਠੇ ਨੇ ਕੋਈ ਸੁਖਮਣੀ ਪੜਨ ਦੇ ਆਏ ਸੇ ਸਤਗੁਰਾਂ ਦੇ ਵਿਜੋਗ ਵਿੱਚ ਵਰਾਗੀ ਹੋਇਆ ਹੈ ਇਹ ਮੁਖਮੀ ਵਾਲਾ ਆਂਦਾ ਮੈਂ ਕੀ ਲਿਖਾਂ ਪੈਦਰੋ ਸਾਰੇ ਤੇ ਤੇ ਮਾਤਾ ਜੀ ਮਿਲ ਪਏ ਮਾਤਾ ਜੀ ਨੂੰ ਕਹੇ ਆਖਿਆ ਬੀਰਾ ਪੁੱਤ ਪਹਿਲੂ ਦੁੱਧ ਪੀ ਲੋ ਤੇ ਪੁੱਛਿਆ ਦੂਸਰੇ ਨੇ ਇਹ ਮਾਤਾ ਕਿਹੜੀ ਆ ਤੇ ਆਖਿਆ ਸਤਗੁਰੂ ਪ੍ਰਤਾਪ ਸਿੰਘ ਜੀ ਦੇ ਮਾਤਾ ਆ ਤੇ ਬਲ ਰੋਣ ਨਿਕਲ ਗਿਆ ਤੇ ਜਿਹਨਾਂ ਦੀ ਡੈਰੀ ਲਿਖਣ ਆਏ ਆ ਮੁਗਬਈ ਕਰਨ ਆਏ ਜਿਹੜੇ ਗੁਰੂ ਦੇ ਮਾਤਾ ਜੈਨੀ ਕਛਦਿਆ ਅਸੀਂ ਦੁਸ਼ਮਣ ਬਣ ਕੇ ਇੱਥੇ ਡੈਰੀ ਲਿਖਣ ਆਏ ਆ ਤੇ ਆਂਦੀਆ ਪੁੱਤ ਵੀਰਾ ਪਹਿਲਾਂ ਦੁੱਧ ਪੀ ਲੋ ਤਰ ਜਾਦਾ ਛੱਡ ਲਿਓ ਜਿਹੜਾ ਉਹਦਾ ਪੁੱਤ ਗੁਰੂ ਆ ਇੱਕ ਦਾਗ ਪਲਵਾਰ ਮੈਂ ਉੱਥੇ ਵੀ ਅਰਜ਼ ਕੀਤੀ ਸੀ ਆ ਉਹਦੇ ਅੱਗੇ ਤਰਲਾ ਮਾਰ ਗਏ ਸੀ ਜਿਹੜੇ ਜੇ ਹੈਗੇ ਆ ਸਾਨੂੰ ਉਹੋ ਜਿਹੀ ਰੱਖਣਾ ਵਡੇ ਵੱਡੇ ਨਾਮ ਧਾਰ ਗਏ ਜਿਹੜੇ ਪਿੰਡ ਵਿੱਚ ਨਹੀਂ ਲੱਗ ਜਾਂਦੇ ਹੁੰਦੇ ਸੀ ਲੋਕੀ ਕੂਕਾ ਬਣ ਜਾਂਦੇ ਹੁੰਦੇ ਸੀ ਲੋਕੀਆਂ ਨੇ ਹੁੰਦੇ ਸੀ ਇੱਕ ਕੂਕਾ ਦੀ ਨੰਗਿਆ ਗਿਆ ਹੈ ਉਹ ਵਾਹ ਉਹ ਇੱਕ ਵਾਰੀ ਪ੍ਰਦੇਸੀ ਨੂੰ ਇੱਕ ਮਿਹਣਾ ਮਾਰ ਲਈਏ ਸੰਦੇ ਜਾਨੀ ਹਾਂ ਮੈਂ ਤੁਹਾਨੂੰ ਨਹੀਂ ਜਾਨਦਾ ਮੈਨੂੰ ਆਪਣੇ ਆਪ ਦਾ ਹੀ ਹੋ ਮੇਰੇ ਬਾਬਾ ਜੀ ਜਦੋਂ ਉਹਨੇ ਹੁੰਦੇ ਆ ਬੋਰਾ ਅੰਥਲੇ ਇਛੂ ਹੀ ਹੁੰਦਾ ਸੀ ਉਹ ਪੁੱਤ ਨਾਮ ਆਇਆ ਕਿ ਕਈ ਜੋਗ ਨਾਮ ਜਪਦਿਆਂ ਨੂੰ ਇਸ ਧਰਤੀ 'ਚ ਉਹ ਪੁੱਤ ਨਾਮ ਧਰਤੀ ਸਾਰੇ ਭੈਣ ਸਾਖ ਦੀਆਂ ਪ੍ਰਕਰਮਾ ਕਰੀ ਜਾਂਦੇ ਹੁੰਦੇ ਸੀ ਉਹ ਤੂੰ Mm-hmm. <laughs> Jangan ketuk-ketuk, jangan ketuk-ketuk, jangan ketuk-ketuk, jangan ketuk-ketuk